ਸ਼ਲੋਕ ਮਹੱਲਾ ਪੰਜਵਾਂ ਨਾਨਕ ਸੋਈ ਦਿਨ ਸੁਹਾਵੜਾ ਜਿਤ ਪ੍ਰਭ ਆਵੇ ਚਿਤ ਜਿਤ ਦਿਨ ਵਿਸਰੇ ਪਾਰ ਬ੍ਰਹਮ ਫਿਟ ਭਲੇਰੀ ਰੁਤ ਕੋਈ ਦਿਨ ਸੁਹਾਵੜਾ ਨਾਨਕ ਕਹਿੰਦਾ ਸੋਈ ਦਿਨ ਸੋ ਉਹ ਦਿਨ ਸੁਹਾਵੜਾ ਜਿਤ ਚਿਤ ਪ੍ਰਭ ਆਵੇ ਚਿਤ ਉਹ ਦਿਨ ਸੁਹਾਵੜਾ ਕੋਈ ਭਲੇਰੀ ਰੁੱਤ ਪਲੀ ਰੁੱਤ ਹੋਈ ਰੁੱਤਾਂ ਜਿਹੜੀਆਂ ਵਾਲੀਆਂ ਨੇ ਆਪਾਂ ਕਹਿੰਨੇ ਆ ਰੁੱਤ ਚੰਗੀ ਐ ਰੁੱਤ ਮਾੜੀ ਐ ਸਾਡੇ ਕੋਈ ਰੁੱਤ ਚੰਗੀ ਦੀ ਕੋਈ ਮਾੜੀ ਦੀ ਕੋਈ ਦਰ ਚੰਗਾ ਦੀ ਕੋਈ ਮਾੜਾ ਦੀ ਜਦ ਚੰਗਾ ਪਾਰ ਬ੍ਰਹਮ ਫਿੱਟ ਭਲੇਰੀ ਰੁੱਤ ਪਾਰ ਬ੍ਰਹਮ ਜਿਤ ਦਿਨ ਵਿਸਰੇ ਆ ਉਹਦਾ ਭਲੇਰੀ ਰੁੱਤ ਭਲੇਰੀ ਵੀ ਹੋਵੇ ਚਾਹੇ ਚਾਹੇ ਉਹ ਪ੍ਰਸੰਦ ਵੀ ਹੋਵੇ ਉਹ ਫਿੱਟ ਐ ਸਾਡੇ ਵਾਸਤੇ ਬੜੇ ਮੋਹ ਸੀ ਸਤਿ ਸਦਾ ਠੀਕ ਹੈ ਮਹੱਲਾ ਪੰਜਵਾਂ ਨਾਨਕ ਮਿੱਤਰਾਈ ਤਿਸਿਉ ਸਭ ਕੁਛ ਜਿਸ ਕੈ ਹਾਥ ਕੁਮਿੱਤਰਾ ਸਈ ਕਾਂਡੀਆਂ ਇਕ ਵੇਖ ਨ ਚੱਲੈ ਸਾਥ ਨਾ ਕਹਿਣਾ ਮਿੱਤਰਤਾਈ ਕਿਹਦੇ ਨਾਲ ਹੈ ਜਿਹਦੇ ਸੰਤੋਖ ਬਸੇ ਅੱਥੇ ਚੱਜੇ ਉਹਦੇ ਨਾਲ ਮਿੱਤਰਤਾਈ ਚਾਹੀਦੀ ਹੈ ਇਦੇ ਹੱਥ ਵਾਸੇ ਕੁਝ ਨਹੀਂ ਉਹਦੇ ਨਾਲ ਕਾਦੀ ਮਿੱਤਰदाई ਹੈ ਉਹਦੇ ਨਾਲ ਮਿੱਤਰदाई ਦੀ ਲੋੜ ਵੀ ਕੀ ਹੈ ਹੱਥ ਵਾਸਤਾ ਕੁਝ ਹੈ ਦੀ ਕੁਮਿੱਤਰਾ ਸਈ ਕਾਂਡੀਆਂ ਇੱਕ ਸਾਥ ਮਿੱਤਰਾ ਸੋਈ ਨੇ ਜਿਹੜੇ ਪੰਨ ਵੀ ਆਪਣੇ ਨਾਲ ਨਹੀਂ ਜਾਂਦੇ ਇੱਕ ਸਾਥ ਨਹੀਂ ਜਾਂਦੇ ਉਹ ਮਿੱਤਰ ਨਹੀਂ ਹੈ ਜਿਹੜੇ ਸਾਥ ਜਿਹਨਾਂ ਦੇ ਸਭ ਕੋ ਹੱਥ ਵਿੱਚ ਉਹ ਨੇ ਪਾਉੜੀ ਅੰਮ੍ਰਿਤ ਨਾਮ ਨਿਧਾਨ ਹੈ ਮਿਲ ਪੀਵੋ ਭਾਈ ਜਿ ਸਿਮਰਤ ਸੁਖ ਪਾਈਐ ਸਭ ਤਿਕਾ 부ਜਾਈ ਉਬਰਦ ਨਾਮ ਦਾ ਦਾ ਖਜ਼ਾਨਾ ਸਾਰੇ ਮਿਲ ਕੇ ਪੀ ਲੋ ਚਾਹੇ ਮਿਲ ਪੀਵੋ ਭਾਈ ਜਿ ਸਿਮਰਤ ਸੁਖ ਪਾਈਐ ਸਭ ਤਿਕਾ 부ਜਾਈ ਜਿਹਦੇ ਸਭੰਦੇ ਰਾळे ਤੇ ਤਾਣ ਵਾਲੇ ਸੁਖ ਮਿਲ ਜਾਂਦਾ ਉਹ ਪਹਿਲਾਂ ਹੀ ਸੁਖ ਮਿਲ ਜਾਂਦਾ ਸਭ ਤਿਕਾ 부ਜਾਈ ਸਾਰੇ ਕ੍ਰਿਸ਼ਨੋ ਦੀ ਹੰਦ ਅੰਦਰ 부ਜਾ ਕਰ ਸੇਵਾ ਪਾਰ ਬ੍ਰਹਮ ਗੁਰ ਭੁੱਖ ਰਹੇ ਨਾ ਕਾਈ ਸਗਲ ਮਨੋਰਥ ਪੁੰਨੀਆਂ ਅਮਰਾ ਪਦ ਪਾਈ ਕਰੀ ਸੇਵਾ ਪਾਰ ਬ੍ਰਭ ਗੁਰ ਭੁੱਖ ਰਹੇ ਨਾ ਕਾਈ ਜੇ ਪਾਰ ਬ੍ਰਹਮ ਦੇ ਬਾਣੀ ਤੇ ਲਈਏ ਭੁੱਖ ਕੈਸੀ ਜੀਤੀ ਰਹਦੀ ਉਹਦੀ ਲਬਨ ਪਾਰ ਬ੍ਰਹਮ ਬੋਲਤਿਆ ਪਰਮੇਸ਼ਰ ਵਰਤਿਆ ਹੋਊਗਾ ਤੇ ਕਿਹਦੇ ਪਰਮਾਤਮਾ ਨਹੀਂ ਵਰਤੇ ਲੋਕ ਪਾਰ ਬ੍ਰਹਮ ਪਰਮੇਸ਼ਰ ਵਰਤੇ ਪਰਮਾਤਮਾ ਨਹੀਂ ਵਰਤੇ ਪਰਮਾਤਮਾ ਦਾ ਸੱਤਿਆ ਦਾ ਲਫ਼ਜ਼ ਬਹੁਤ ਹੀ ਠੱਗਿਆ ਜੀ ਵਾਸਤੇ ਵਰਤਿਆ ਹੈ ਲਫ਼ਜ਼ ਐਟੇ ਹੀ ਸਾਡਾ ਸਾਰਾ ਪ੍ਰਚਾਰ ਫਸਿਆ ਹੋਇਆ ਸਾਡੇ ਟੀਕੇ ਫਸੇ ਕਿੱਥੇ ਨੇ ਪਰਮਾਤਮਾ ਨੇ ਵਰਤ ਪਰ ਇੱਥੇ ਪਰਮਹੰਮ ਵੀ ਵਰਤੇ ਆ ਜੀ ਜਾਣਦੇਣ ਵਾਲਾ ਪਰਮਹੰਮ ਹੈ ਹਾਂ ਯਾਰ ਮਿਲਦਾ ਕੋਈ ਤਿੱਧਾ ਇਹਦਾ ਨਾਲ ਇਹਦੀ ਸਾਥੇ ਜਿਵੇਂ ਮਾਤਾ ਮੁੱਠੀ ਨਿਆਣਾਂ ਨੂੰ ਜੇ ਯੇ ਬੇਸਾਰੇ ਹਰਦੇ ਤੇ ਕੁਝ ਨਾ ਕੁਝ ਨਾਣੇ ਆਜਣੇ ਉਹਨਾਂ ਨੇ ਚਾਹੇ ਦੋ ਦੋ ਪਤਾਸੇ ਹੀ ਦੇਣੇ ਤੇ ਕਿੱਕ ਲੈ ਕੇ ਜਾਣ ਦੇਣਾ ਬੱਚਿਆਂ ਨੂੰ ਐ ਨੂੰ ਦੇ ਕੇ ਜਾਂਦਾ ਕੁਝ ਆਰ ਬ੍ਰਹਮ ਰੂਪੀ ਗੁਰਦੀ ਜੇ ਸੇਵਾ ਕਰੇ ਕੋਈ ਤਾਂ ਭੁੱਖ ਰਹੇ ਨਾ ਫਿਰ ਭੁੱਖ ਵਾਲੀ ਰਹਿ ਜਾਣੀ ਠੀਕ ਹੈ ਜੀ ਸਗਲ ਮਨੋਰਥ ਪੁੰਨੀਆਂ ਅਮਰਾ ਪਦ ਸਗਲ ਮਨੋਰਥ ਪੁੰਨੀਆਂ ਅਮਰਾ ਪਦ ਸਾਰੇ ਬ੍ਰੋਹਰ ਪੂਰੇ ਕਰਨਗੇ ਅਮਰਾਬਦੀ ਪ੍ਰਾਪਤੀ ਹੋ ਜੂ ਹਮਰਾ ਪਦ ਚੌਥਾ ਪਦ ਹੈ ਚਾਰ ਪਦਾਰਥ ਲੈ ਕੇ ਆ ਤੂੰ ਹੈ ਪਾਰ ਬ੍ਰਹਮ ਨਾਨਕ ਸ਼ਰਨਾਈ ਸੁਧ ਜੇਵੜ ਤੂੰ ਹੈ ਪਾਰ ਬ੍ਰਹਮ ਪਾਏ ਪਾਰ ਬ੍ਰਹਮ ਜਿੰਦਾ ਤੂੰ ਮੌੜਾ ਕੋਈ ਤੂੰ ਐਸਾ ਤੁਸੀਂ ਕੀ ਉਗਮਾ ਦੀਜਾ ਠੀਕ ਹੈ ਜੀ ਨਾਨਕ ਤਾਂ ਤੇਰੀ ਸ਼ਰਨਾਈ ਹੈ